ਇਹਨਾਂ ਨਸਵਾਨ ਨੂੰ ਗੀਤ ਵੀ ਕਿਹਾ ਜਾ ਸਕਦਾ ਹੈ ਕਾਥੀਆ ਵੀ ਕਿਹਾ ਜਾ ਸਕਦਾ ਹੈ ਕਾफी ਆਸਤੇ ਨੇ ਕਪਾਤੋਂ ਨਿਕਲੀਏ ਕਾਬਤੋਂ ਤਾਂ ਨਿਕਲੀਏ ਕਵਾਤੀ ਤਾਂ ਨਿਕਲੀਏ ਕਾफी ਖਟਾਟ ਹੈ ਔਰ ਲਫ਼ਜ਼ ਵੀ ਆਪਣੇ ਮਾਨੇ ਬਦਲਦੇ ਰਹਿੰਦੇ ਨੇ ਆਸਤੇ ਨੇ ਇੱਕ ਪੰਚਮ ਜਿਹਾ ਰਾਗ ਹੈ ਪਿਛੇ ਜਦੋਂ ਮੈਂ ਗਾਂਧੀ ਹੋਰਾਂ ਦੀ ਕਿਤਾਬ ਪੜੀ ਬਾਗ ਉਰੇ ਅੰਦਰ ਹੈ ਪੰਚਮ ਇੱਕ ਪੂਰਿਆਂ ਦੀ ਰਾਤ ਹੈ ਇਹ ਰਾਗ ਰਾਗਨੀਆਂ ਐਸੇ ਦਿੱਤੀ ਦੀ ਪਿਦਾਸ਼ ਨੇ ਐਫ ਹੋਈਏ ਸਰਜੀਆਂ ਨੇ ਤੇ ਦਸ ਸਾਡੇ ਦੇ ਉਪਰੇ ਹੁੰਦੇ ਨੇ ਪਰ ਉਹਨਾਂ ਦੇ ਅੰਦਰ ਉਹ ਆਪਣੇ ਮਾਨੇ ਬਦਲਦੇ ਰਹੇ ਨੇ ਕਾਫੀ ਸ਼ਾਹ ਹਸਨ ਟੁੱਟਦੀ ਹੋਈ ਬੁੱਲੇ ਤੱਕ ਪਰਦੀ ਸਚਲ ਤੱਕ ਬਾਜਾ ਫਰੀਦ ਤੱਕ ਦੇ ਉਸ ਕਾਫੀ ਨੂੰ ਇੱਕ ਨਵੀਂ ਸ਼ਕਲ ਦੇਣ ਚ ਜਦੋਂ ਸੰਸਿਧ ਨੇ ਆਪਣੇ ਵੱਲੋਂ ਉਹਦੇ ਅੰਦਰ ਲੋਕ ਗੀਤਾਂ ਦਾ ਰਸ ਰੱਖਿਆ ਤੇ ਇੱਕ ਆਪਣੀ ਦਾਣਾਈ ਲੈ ਕੇ ਮੈਂ ਬੜੀਆਂ ਕੰਪੋਸਟ ਗੀਤ ਜਾਂ ਕਾਫੀਆਂ ਲਿਖੀਆਂ ਨੇ ਇਹ ਸੋਣੇ ਵਿੱਚ ਰਸ ਹੋਵੇ ਤੇ ਮਹਿਸੂਸ ਕਰੋ ਸਜਣ ਹੱਡ ਰਚਵਾ ਜ਼ਹਿਰ ਪਿਵਾ ਵਾਜ ਪਹਾੜਾਂ ਅੰਦਰ ਕੰਬੇ ਹੱਥ ਵਿੱਚ ਘੁੰਮ ਦੁਆ ਵਾਜ ਪਹਾੜਾਂ ਅੰਦਰ ਕੰਬੇ ਹੱਥ ਵਿੱਚ ਘੁੰਮ ਦੁਆ ਸਜਣ ਹੱਡ ਰਚਵਾ ਜ਼ਹਿਰ ਪਿਵਾ ਜ਼ਹਿਰ ਪੁਝਾਰਤ ਅਗ ਜੰਗਲ ਦੀ ਮਟੀ ਰਹੀ ਸਜ਼ਾ ਸਜਣ ਹੱਡ ਰਚਵਾ ਜ਼ਹਿਰ ਪਿਵਾ ਕਟੀਆਂ ਬਾਵਾ ਕਰਨ ਇਕੱਠਾ ਰੋਸ ਨਮਾ ਦਰਿਆ सजन हड रचवा जहर पिवा मौत सुनेड़े हंसा वादे पैरा विच खड़ा सजन हड रचवा जहर पिवा अर्शद केड़े कुलजम मंदर हो गई कैद हवा सजन हड रचवा जहर पिवा इक नस